ਸਤਿ ਪਤੀ ਮਾਲੂਕ ਕੀ ਟੇਕ ਬਿਰਤੀ ਸਭ ਜਾਣ ਦੇਖੋ ਪਹਿਲੀ ਉਹ ਪੰਕਤੀ ਇਹ ਹੈ ਭਈ ਬੁਰਖ ਦੀ ਟੇਕ ਜਿਹੜੀ ਚਾਹੇ ਫਰਮਜਾਨੀ ਵਾਰੇ ਅਸੀਂ ਕੁਝ ਵੀ ਕਹਤਾ ਚਾਹੇ ਸੰਤ ਦੇ ਦੋਖੀ ਵਾਸਤੇ ਕੁਝ ਵੀ ਕਹਤਾ कहता। ਜਿਹੜਾ ਵਿਅਕਤੀ ਉਹਦੇ ਤੇ ਦੇਖਣਾ ਨਾ ਥੱਲੇ ਡੁੱਬ ਜਾਉ ਕੋ ਅਦੋਨੇ ਜੇ ਤੁਸੀਂ ਉਹਤੇ ਟੇਕ ਰੱਖੇ ਉਹੀ ਗੱਲ ਨਹੀਂ ਫਿਰ ਮਰਦੇ ਜੇ ਆਪਣੀ ਜਲਾਈ ਆਪਣੀ ਜਲਾਈ ਦੇ ਡੁੱਬੋ ਡੁੱਬ ਜਾਓ ਆ ਕੁਝ ਕਰਦੇ ਨੇ ਲੋਕ ਜਿਬੋਣ ਵਾਲੇ ਜਿਹੜੇ ਨੇ ਨਾ ਜਾਣਦੇ ਨੇ ਉਹ ਪਰ ਬਾਬਾ ਗੁਰੂ ਬਣ ਗਿਆ ਤੇ ਗੁਰੂ ਗ੍ਰੰਥ ਨੂੰ ਗੁਰੂ ਬਣਾ ਕੇ ਕਿੱਤੀ ਗੁਰੂ ਦੀ ਗੱਲ ਚਰਦੀ ਗੱਲ ਦੀ ਸੀ ਉਹਨਾਂ ਨੇ ਕਰਤੀ ਏਸੇ ਦੇਖੋ ਉਹ ਵੜਿਆਈ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਲੋਈ ਕੱਡੀ ਸ਼ਰਾਰਤ ਕੀਤੀ ਕਿੱਥੇ ਚੱਲੀ ਝੂਠੀਆਂ ਕਹਾਣੀਆਂ ਲਿਖ ਕੇ ਝੂਠੀਆਂ ਕਸਾਕੀਆਂ ਲਿਖ ਕੇ ਉਹ ਜਵਾਈ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਹੋਣ ਲੱਗੀ ਹੁਣ ਯਾਨੀ ਕਿ ਸ੍ਰੀ ਪੂਰਤੀ ਪੂਜਾ ਸ਼ੁਰੂ ਕਰਤੀ ਤੁਹਾਡੀ ਗੱਡੀ ਚਲਾਕੀ ਨਾਲ ਕਰਦੀ ਏਸੀ ਹੁਸ਼ਿਆਰੀ ਚਲਾਕੀ ਉਹ ਕਹਿੰਦੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜੀ ਬੜੀ ਇੱਜ਼ਤ ਹੈ ਆਪ ਬਣਾ ਕੇ सतकार कमेटी उनो पूछे सतकार दा थोड़े बण छोड़ण जाइए दांचे सतकार है गुरबानी दा गुरबानी दा की है केडी चीज दा सतकार है सिर्फ जे र मल्ले ने इसका दा सतकार है ਗੁਰਬਾਨੀ ਕੀ ਕਹਿੰਦੀ ਉਹਨੂੰ ਮੰਨਰ ਦਾ ਸੰਕਾਲ ਨਹੀਂ ਹੈ ਬੰਨ ਆਪ ਤਾਂ ਦੇਖੋ ਉਹ ਬਚਾਅ ਕੇ ਵੀ ਤੁਸੀਂ ਕੀ ਕਰਦੇ ਹੋ ਨੌ ਰਖਲੇ ਸੰਸਕਾਰ ਚ ਸਭ ਸ਼ਰਾਰਤੀ ਸਸਤੀ ਸਸਤੀ ਰੋਪੀਏ ਦਾ ਲੈਣ ਵਾਲੇ ਨੇ ਸਸਤੀ ਲੀਡਰ ਬਣਦੇ ਵਾਲੇ ਗੁਰਬਾਨੀ ਮਸਲੀ ਜਿਹਾ ਖਾਂਦੇ ਬਿਠੋੜ ਗੁਰਬਾਨੀ ਦਾ ਇੱਕ ਖੱਡੀ ਬਣਨਾ ਨਾ ਸਮਝਣਾ ਤੇ ਸਿੱਖਾਂ ਦੇ ਲੀਡਰ ਵੀ ਬਣਨਾ ਇਹ ਜਿਹੜੇ ਲੀਡਰ ਨੇ ਇਹਨਾਂ ਨੇ ਸਿੱਖੀ ਤੋਂ ਹੈ ਇਸ ਕਰਕੇ ਇਹਨਾਂ ਦੇ ਬੁੱਲ ਨਹੀਂ ਚੱਖਦੇ ਚੱਖਦੇ ਚੱਖਦੇ ਅਸੀਂ ਦੇਖਦੇ ਹਾਂ ਇਹਨਾਂ ਤੋਂ ਸਭ ਕੁਝ ਖੋਲਣ ਲੱਗੇ ਇਹਨਾਂ ਦਾ ਜਿਹੜਾ ਚੰਦ ਜਾਣ ਦਾ ਝਾੜ ਦਾ ਦਾ ਕਾਲ ਤੱਕ ਤੇ ਜਾ ਕੇ ਤਲਵਾਰਾਂ ਚੁਲੋ ਲੈਣੇ ਗੋਲਖਾਨ ਨੂੰ ਦੋ ਦੋ ਜਿੱਦੇ ਲਾਏ ਹੋਏ ਨੇ ਫਿਰ ਵੀ ਕੋਈ ਹੋਈ ਜਾਂਦੀ ਹੈ ਬਜ਼ਾਮੀ ਇਹਨਾਂ ਨੇ ਬਿਧੇ ਕਰਾ ਦਿੱਤੀ ਕਮਦ ਗਾਂ ਨੂੰ ਕਮ ਦਾ ਜਾਨ ਦੇ ਦਈਏ ਖਗਵਨ ਖਾਣੇ ਦੇ ਉੱਪਰ ਜਿੱਕਰ ਦਨ ਕਰੀ ਜਾਂ। ਅਸੀਂ ਕੀ ਲੜਨ। ਹੁਣ ਲੋੜ ਸੋਨਾ ਜਾ ਬਲੈਂਡ ਆਪਣਾ ਖਾ ਲੈਣ ਉਹਦੀ ਕੀ ਲੈਣਾ ਤੇ ਸਾਡੇ ਕੋਲ ਤਾਂ ਕੈਸਾ ਸੁਣਦਾ ਸੀ ਉਸ ਮੱਠੀ ਹੈ ਕੈਸਾ ਅਮਰ ਤੇਜੀਬੇ ਖਾਟੀ ਹੈ ਕੈਸਾ ਮਨ ਕੈਸਾ ਮਹਾਨ ਹੈ ਕੈਸਾ ਰੰਗ ਕੈਸਾ ਰਾਜਾ ਨਾ ਕੋਲੀ ਹੈ ਤੇ ਅਸਲੀ ਤੇ ਚਲਣਾ ਸੋਨਾਂ ਦੀ ਕੋਈ ਵੈਲੀ ਹੁੰਦੀ ਨਹੀਂ ਰਮਨ ਲਿਆ ਕੋਈ ਵੈਲੀ ਹੁੰਦੀ ਨਹੀਂ ਇਹ ਬੈਲਿਓ ਫੇ ਮਾਇਆ ਦੀ ਹੈ ਫੇ ਕੌਣ ਵੱਡਾ ਮਾਇਆ ਵੜਿਆਈ ਅੰਮ੍ਰਿਤ ਸਰ ਕਿਉਂ ਵੜਾਉਂਦੇ ਸੋਨਾ ਚੜਿਆ ਹੋਇਆ ਹੈ ਤੁਸੀਂ ਚੜਾਵਾ ਜ਼ਿਆਦਾ ਮਾਇਆ ਵੜਿਆਈ ਹੈ ਉਹ ਬਾਲੇ ਦੇ ਘਰੋਂ ਵਾਲਾ ਗਰਵਾੜਾ ਕੋਈ ਜਾਨਦਾ ਮਥਾ ਦੇ ਕੋਈ ਉੱਤੇ ਇਥੇ ਤੋਂ ਬਸਾਂ ਜਾਂਦੇ ਕਿੰ ਉਹ ਘਰਵਾਨੀ ਕੀ ਆ ਵਾਹ ਤਾਂ ਜਾਈਏ ਜੋ ਇਹ ਹਾਂ ਹੋਏ ਉਗਲ ਕਿਥੇ ਗਈ ਦੂਜਿਆਂ ਨੂੰ ਸਿੱਖਿਆ ਦੇਦੇ ਹੋ ਤੁਸੀਂ ਖਾਗਰਦਵਾਲੇ ਜਾਣ ਦੀ ਲੋੜ ਨਹੀਂ ਇੱਕ 100 ਸਾਲ ਦੇ ਬਜ਼ੁਰਗ ਨੂੰ ਤੁਸੀਂ ਛਡਾਇਆ ਕਬੀਰ ਨੇ ਖਾਗਰਦਵਾਲੇ ਜਾਣ ਤੋਂ ਉਹ ਵੀ ਤਾਂ ਖਾਗਰਦਵਾਲੇ ਵਰਗਾ ਹੀ ਹੈ ਛੋਟਾ ਵੀ ਹੈ ਉੱਥੇ ਕੀ ਕਰਦਾ ਹੈ ਕੀ ਲੈ ਕੇ ਆਇਆ ਉਹ ਆਤ ਜਾਈਏ ਜੇ ਆਉਣੀ ਹੈ ਉਸੇ ਕੋਈ ਇਥੇ ਪੈਦਾ ਕੀਤਾ ਤਾਂ ਉਸ ਦਾ ਵੀ ਪੈਦਾ ਹੋਇਆ ਜਿਹਨੂੰ ਯਾਦ ਹੋਵੇ। ਇਹ ਹੀ ਸਾਬਤ ਕਰਦਾ ਵੀ ਇਥੇ ਕੀ ਹੈ ਗੁਰਦੁਆਰਿਆਂ 'ਚ ਜਿਹੜੀ ਗਿਆਨੀ ਪੈਦਾ ਹੋਇਆ ਸਾਬਤ ਕਰਦਾ ਵੀ ਇਥੇ ਕੱਖ ਨਹੀਂ ਹੈ। ਨਾਲੇ ਬੁੱਧਾਂ 'ਚ ਕੋਈ ਪੈਦਾ ਹੋਇਆ ਸੀ। ਸਾਡੇ ਰਿਆਂ 'ਚ ਕੁਝ ਪੈਦਾ ਹੋਇਆ ਸੀ ਨਾ ਹੋਣ ਵਾਲੇ ਗੁਰਦੁਆਰਿਆਂ 'ਚ ਕੁਝ ਪੈਦਾ ਹੋਇਆ ਗਿਆ। ਅਤਵਾਦ ਵੀ ਪੈਦਾ ਤਾਂ ਜਦੋਂ ਇਹਨਾਂ ਦੇ ਹੱਥ ਜਿੱਥੇ ਮਾਇਆ ਹੂ ਅਤਵਾਦ ਤਾਂ ਹੋਣੀ ਹੀ। ਇਹ ਤਾਂ ਮਾਇਆ ਦੀ ਰਈ ਹੈ। ਉਹ ਸਰਕਾਰ ਦਾ ਵੀ ਅਤਵਾਦ ਇਹ ਹੁੰਦਾ ਹੈ ਸਰਕਾਰ ਵੀ ਡੰਡਾ ਨਾਲ ਰਾਜ ਕਰਦੀ ਹੈ ਅਤਵਾਦੀ ਆਪਣਾ ਡੰਡਾ ਚਲਾਉਂਦੇ ਨੇ ਲੋਕਾਂ ਨੂੰ ਆਪਣੇ ਨਾਲ ਬੈਠਣ ਨੂੰ ਉਹ ਮਾਇਆ ਦੀ ਲੜਾਈ ਹੈ ਮਾਇਆ ਹੀ ਗੁਰਦਾਨ ਗੁਰਦਾਨ ਤੇ ਵੜਾਈ ਜਰ ਨਹੀਂ ਹਨੇ ਆਵੇ ਪਾਇਆ ਬੜੀ ਹੈ ਔਰ ਇਹਨਾਂ ਨੇ ਤਲਵਾਰਾਂ ਦੋ ਲੋਹੇ ਦੀਆਂ ਸੀ ਜਿਹਨੂੰ ਬਾਦਸ਼ਾਹ ਦੇ ਭਾਈਆਂ ਨੇ ਕਹਾਂ ਥੜਕਦਾ ਨਾ ਨਿਰਾਇ ਦਿੱਤੀ ਝਾਂ ਘੜਕਦਾ ਨਾ ਗੱਲੇ ਦੀ ਖਤ ਕਰ ਦੋ ਤਲਵਾਰਾਂ ਲੋਹੇ ਦੀਆਂ ਇਹਨਾਂ ਦੀ ਦੋ ਹੀ ਤਲਵਾਰਾਂ ਲੋਹੇ ਦੀਆਂ ਅਧੋਨ ਵਾਲੇ ਰੜਿਆਣ ਸਿੱਖੀ ਅੱਤੇ ਛੱਡ ਬੈਠੇ ਗਿਆਨ ਛੱਡ ਬੈਠੇ ਬਾਣੀ ਕੋ ਜੋ ਸਿਆਣਕ ਜਿਹਨੂੰ ਸਿਮਰੋ ਹਰਿ ਆਰਾਏ ਏਕ ਆਸਨ ਮਨ ਰੱਖੋ ਨਾਲਕ ਦੁਖ ਭਰਮ ਭੋਜਾਇ ਏਕ ਦਾ ਮਨ ਰੱਖੋ ਹਰ ਵਾਲੀ ਆਸ ਹੀ ਮਨ ਚੋਵੇ ਮੰਤਿ ਆਸ ਹੋਸੀ ਹਸਦੀ ਹੋਸੀ ਅਗਲੇ ਦੀ ਆਸ ਹੋਰਾਂ ਮਨ ਚ ਹੋਰ ਮਾਨਕ ਨਾ ਨੇਹ ਦੇ ਯਾਸ ਹੋ ਰਹਾ ਹੈ ਆਤਮਾ ਦੀ ਯਾਸ ਹੋ ਰਹਾ ਹੈ ਅੰਤਿਆਸ ਹੋ ਰਹਾ ਹੈ ਸਰ ਗੁਰਬਾਨੀ ਸੁਣਨ ਦਾ ਬਦਲ ਲੱਗਦਾ ਵੀ ਹਾਂ ਬਈ 10 ਸਵਾਲ ਚਾਹੀਦਾ ਤਾਂ ਨਹੀਂ ਖੋਣਦੇ ਦੇ ਕੰਮ ਕਰ ਸਵਾਲਾਂ ਨਾਲ ਚਾਹੀਦਾ ਹਲੋ ਕੀ ਟੇਕ ਬ੍ਰਿਤੀ ਸਭ ਦੇਵਨ ਕੋ ਇੱਕ ਭਗਵਾਨ ਮਾਨੁਕ ਕੀ ਟੇਕ ਬ੍ਰਿਤੀ ਸਭ ਆਦਮੀ ਤੇ ਦੇਖਣਾ ਲਖ ਲਿਓ ਆਦਮੀ ਤੁਸੀਂ ਵੀ ਹੋ ਬੰਦਾ ਦਾ ਮਤਾ ਨਹੀਂ ਬਣੀਦਾ ਹੁੰਦਾ ਪਰਮੇਸ਼ਰ ਦਾ ਬੰਦਾ ਬਣੀਦਾ ਜਿਹਦੇ ਹਨ ਜੋੜਿਆ ਜਿਹੜੇ ਹੁਕਮ ਨੇ ਸਾਨੂੰ ਵਾਇਆ ਦੇਣਾ ਉਹਦਾ ਮਤਾ ਬਣ ਆਦਮੀ ਨਾ ਜੋੜ ਸਕਦਾ ਨਾ ਤੋੜ ਸਕਦਾ ਤੇ ਤੋੜਦਾ ਵੀ ਹੈ ਉਹਦੇ ਹੁਕਮ ਨਾਲ ਤੋੜ ਸਕਦਾ ਜੋੜ ਸਕਦਾ ਹੀ ਨਹੀਂ ਤੋੜ ਵੀ ਉਹਦੇ ਹੁਕਮ ਤੇ ਬਣਾ ਨਹੀਂ ਸਕਦਾ ਆਦਮੀ ਆਦਮੀ ਭਗਵਾਨ ਉਹਦੇ ਟੇਕ ਵਰਤੀ ਸਮਝਾਂ ਦੇਵਨ ਕੋਈ ਇੱਕੇ ਭਗਵਾਨ ਕੁਝ ਜਿੱਥੋਂ ਬਣਨਾ ਉਹ ਭਗਵਾਨ ਇੱਕੋ ਹੀ ਸੱਚਖੰ ਜਿਹੜਾ ਭਗਵਾਨ ਬੈਠਾ ਨਾ ਉਹ ਰੂਪ ਜਾਇਉਂਦਾ ਜਨੇ ਵਰਜੀ ਹੈ ਉਹ ਇੱਕੋ ਹੀ ਹੈ ਉਹਨਾਂ ਜਿਹੜਾ ਮਤ ਭੇਜਦਾ ਜਾਂ ਮਤ ਭੇਜਦੇ ਵੀ ਇੱਕੋ ਹੀ ਨੇ ਉਹ ਸਾਰੇ ਇਹ ਕੋਈ ਗੱਲ ਬੋਲਣੀਆਂ ਜ਼ਰੂਰ ਨਹੀਂ ਸੌ ਸਿਆਣੇ ਇੱਕ ਮਤ ਤਾਂ ਹੀ ਕਹਿੰਦੇ ਜਾਨ ਜੇ ਨ ਵਰਦੀ ਹੋਂ ਮਾਤੇ ਕੋਈ ਹੁੰਦੀ ਹੋਣੀ ਜਿੱਤੇ ਭਾਤੇ ਕਾ ਉਤੇ ਦੁਆ ਹੁੰਦਾ ਹੀ ਨਹੀਂ ਬਰਦਾ ਇਹ ਕੋਣ ਕੋਇ ਕੇ பகਵਾਨ ਜਿਸਕੇ ਬਿਜੇ ਰਹੇ ਆਏ ਜਿਸਕੇ ਰਹੇਗਾ ਇਹਦੇ ਦਿੱਤੇ ਨੇ ਆਨੰਦ ਰਹੇ ਆਨੰਦ ਭੋਗਦੇ ਦਵਾਰਾਂ ਮੁੜੇ ਨਾ ਬੋਕ ਇੱਕ ਵਾਰੇ ਮੰਗ ਲਵੇ ਮਾਂਗਲਾ ਆਏ ਤੋ ਦੇਖੋ ਬੰਬਾ ਮੰਗਲਾ ਹਾਰੇ ਆਣਾ ਬਸਰਾਲ ਦਾ ਆਣਾ ਧੁਰ ਧੁਰ ਜੀ ਮੁਕੀ ਜਾਂਦਾ ਸੇਵਨ ਹਾਰ ਤਰ ਤਾਰ ਜਿਹੜਾ ਉਹ ਸਿਆਣਾ ਹੈ ਪਰ ਤੂੰ ਵੀ ਸਿਆਣਾ ਬਣ ਕੇ ਮੰਗਲਾ ਆਏ ਤੋ ਇੱਕੋ ਮਾਨ ਨਾਂ ਦੀ ਜਿਹਾ ਸੇ ਪਰਿਪਰਾਵ ਉਹ ਇੱਕੋ ਚੀਜ਼ ਮੰਗਲਾ ਜਿਹਨਾਂ ਭੁੱਖਾ ਕਰੇ ਬਾਹਰ ਹੋ ਜੀਂਦੀ ਇਹ ਜੀ ਇੱਕ ਮੰਗਲਾ ਭਾਗਾਂ ਦਾ ਤੇ ਪਾਰ ਹੋ ਜੀ ਉਹ ਬਾਕੀ ਭਾਗਾਂ ਦਾ ਪਾਰਦ ਕਰਨ ਵਾਸਤੇ ਵਗਦਾ ਵੀ ਸੌਖਾ ਹੋ ਕੇ ਤਾਂ ਪਾਰ ਕਰਨਾ ਸੌਖੇ ਤਰੀਕੇ ਨਾਲ ਕਰਨਾ ਉਹਨੂੰ ਐਂ ਹੀ ਕਹਦੇ ਭਾਗਾਂ ਦੇ ਸਾਰਾ ਕੋ ਆ ਗਿਆ ਉਹ ਜੋ ਮਰਜ਼ੀ ਕਰੇ ਅਈ ਤਾਂ ਪਾਲੇ ਪਾਸੇ ਜਾ ਤੂੰ ਬੜੇ ਫੜ ਕੇ ਤੋਰ ਕੇ ਲੈ ਜਾ ਤੂੰ ਹਵਾਈ ਜਾਂ ਚ ਲੈ ਜਾ ਤੂੰ ਤੇ ਮੇਰੀ ਮਰਜ਼ੀ ਉਵੇਂ ਲੈ ਲੈ ਅੱਜ ਮੈਂ ਤੇਰੀ ਮਰਜ਼ੀ ਉਵੇਂ ਪਰਪਾ ਪਾਵਦਾ ਦਰਬਾਰ ਕਰ ਬਸ ਇੱਕ ਇਸ ਕੋਈ ਮਤਲਬ ਨਹੀਂ ਸੀ ਬਹੁਤੀਆਂ ਮੁੰਡਾ ਕੀ ਕਰ ਰਹੇ ਹਨ ਮਾਰੇ ਰਾਖੇ ਏਕੋ ਆਪ ਮਨੁੱਖ ਕੇ ਮਾਰੇ ਰਾਖੇ ਏਕੋ ਆਪ ਬਚਾਉਣ ਵਾਲਾ ਮਾਰ ਨਾਲ ਕੋਈ ਹੈ ਮਨੁੱਖ ਤੇ ਕੋਈ ਨਹੀਂ ਆਜ ਅੱਜ ਦੇ ਹੱਦ ਕੁਝ ਨਹੀਂ ਤੇ ਕੱਲ ਨੂੰ ਕੋਈ ਦੁਖਤਾ ਭੈਗੀ ਕੋਈ ਮੁਖਰ ਨਹੀਂ ਬਚਾਉਣਾ ਦੁਖਤਾ ਆਪ ਜਾ ਕੇ ਹੱਥੀਂ ਕੁਝ ਕਰ ਸਕਦਾ ਹੈ ਉਹ ਦੀਂਦਾਬ ਨਹੀਂ ਕੋਲੇ ਖੜਾ ਉਹ ਕੋਲ ਖੜਾ ਦੀਂਦਾ ਨਹੀਂ ਹੈ ਪਤਾ ਨਹੀਂ ਕਿੱਥੇ ਹੋਊ ਆਦਮੀ ਪਤਾ ਨਹੀਂ ਕਿੱਥੇ ਹੋਊ ਉਦੋਂ ਐਡੀ ਦੂਰ ਹੋਵੇ ਪਹੁੰਚ ਬਣਾ ਸਕੇ ਉਹ ਹਰ ਵਕਤ ਆ ਰਹੇ ਤੇਰੇ ਸਭ ਦੇ ਨਾਲ ਹੈ ਤੇਰੇ ਕੀ ਸਭ ਦੇ ਨਾਲ ਹੈ ਬਾਰੇ ਰੱਖੇ ਉਹ ਆਪ ਤਾਂ ਹੀ ਦਾ ਮਾਲ ਰੱਖ ਸਕਦਾ ਨਹੀਂ ਰੱਖਦਾ ਤਾਂ ਹੀ ਦਾ ਮਾਲ ਰੱਖ ਸਕਦਾ ਜੇ ਉਹਨਾਂ ਬਚਾਉਣਾ ਬਦਲੀ ਪਤਾ ਤੁਹਾਨੂੰ ਹੈ ਵਿਰਾਜ ਬਦਲੀ ਆ ਸਕਦੀ ਤੇ ਜਿਆ ਬਦਲ ਤੂਗਾ ਇਹਨੂੰ ਬਹੁਤਾ ਪਤਾ ਨਹੀਂ ਕਿ ਡਾਕਟਰ ਦੀ ਗੱਲ ਕੀ ਹੋ ਰਹੀ ਹੈ। ਚਾਹੇ ਇਹਨੂੰ ਡੀ ਨਾਲ ਹੀ ਜੋ ਹੋ ਰਿਹਾ ਉਹ ਇਹਨਾਂ ਨੂੰ ਕੀ ਬਤਾ ਕੀ ਕਰਦਾ। ਪਰ ਇਹਨਾਂ ਦਾ ਹਵਾ ਜਿਹੜੀ ਆਉਂਦੀ ਹੈ ਉਹ ਜਿਹੜਾ ਸ਼ਰ ਹੈ ਤੀਰਾਂ ਦੀ ਦਰਵਾਜ਼ਾਂ ਦੀ। ਗੋੜੀਆਂ ਦੀ ਉਹ ਬਦਲਦੀ ਹੈ। ਕੋਈ ਜੇ ਕੋਈ ਹੋਰ ਸ਼ਕਤੀ ਹੋਵੇ ਬਲਾ ਵਿੱਚ। ਉਹ ਨੂੰ ਉਹ ਬਗਵਤੀ। ਉਹ ਬਸ ਉਹ ਲੀਆ ਜਮੀਨ ਤੋਂ ਸ਼ਕਤੀ ਉਹਦੇ ਵਿੱਚ ਕੋਈ ਨਹੀਂ ਉਹ ਸਰਦੀ ਉਹ ਨਹੀਂ ਕੋਈ ਉਹ ਇਹ ਸਾਨੂੰ ਨਹੀਂ ਭਰੋਸਾ ਨਾਲ ਗੱਲਾਂ ਦਾ ਨਾ ਹੋਵੇ ਇਹਨੇ ਦੇਖਿਆ ਉਹਨਾਂ ਦੱਸੀ ਹੈ ਜਿਹਨੇ ਮੰਨ ਲੈਣੀ ਉਹਨੇ ਦੇਖ ਵੀ ਲੈਣੀ ਹੈ ਜਿਹਨੇ ਦੇਖਣ ਤੋਂ ਪਹਿਲਾਂ ਇਹ ਗੱਲ ਮੰਨ ਲੈਣੀ ਹੈ ਸੱਚਾ ਉਹਨੇ ਦੇਖ ਲੈਣੀ ਹੈ ਜਿਹਨੇ ਸੱਚ ਨਹੀਂ ਮੰਨਣਾ ਉਹਨੂੰ ਦੱਸਣਾ ਨਹੀਂ ਹੋਣਾ ਸੱਚ ਹੈ ਗੱਲ ਹੈ ਤਾਂ ਕਿਹਾ ਵੀ ਗੁਰਬਾਣੀਆਂ ਬਹੁਤ ਸਾਰੀਆਂ ਗੱਲਾਂ ਹੈ ਨੇ ਬੰਨਣ ਜੀ ਨਹੀਂ ਆਉਣੀਆਂ ਤੁਹਾਡੇ ਇਹਨੂੰ ਸੱਤ-ਸੱਤ ਕਰਕੇ ਮਰੋ ਗੁਰਸਿੱਖੋ ਇਹ ਕਰਤਾ ਪਰਮਖੋ ਆਪ ਮੁਖੋ ਬੜਾਏ ਇਹ ਕੜਾਈਆ ਗੁਰਮੁਖੋ ਆਪ ਮੁਖੋ ਹਾਕਮ ਨੇ ਜਿਹਦਾ ਹੁਕਮ ਹੈ ਚਾਹ ਤੋ ਕਹਿੰਦਾ ਮਾਰੇ ਰੱਖੇ ਕੋ ਆਪੋ ਪਾਵੇ ਮੈਨੂੰ ਇਹਦੇ ਕਹਾ ਰਿਹਾ ਦੂਹੇ ਤੇ ਐਂ ਮੈਂ ਨਹੀਂ ਕਹਾ ਆਪ ਕਹਤਾ ਦੂਹੇ ਕਹਾਤਾ ਦੂਹੇ ਕਹਾਤਾ ਆਪ ਤੇ ਹੀ ਗਿਰ ਗਏ। ਮਾਰੇ ਰੱਖੇ ਇਹੋ ਆਪ। ਮਾਰਦ ਦਾ ਕੁਝ ਨਹੀਂ ਯਾਦ। ਪਾਵੇਂ ਤੁਹਾਨੂੰ ਲੱਗਦਾ ਆਦਮੀ ਮਾਰਦਾ ਫੜੇ ਦੇ ਹੱਥਿਂ ਗੁਰਸ਼ੀਆਂ। ਉਹ ਇਹਦੇ ਵਿਚਾਲੇ ਤੋਂ ਹੋਂਦੇ ਕਾਜ਼ੀ ਤਲਵਾਰ ਨਾ ਆਇਆ ਗੋਲੀ ਨਾਲ ਬਾਹਰ ਰਿਹਾ। ਸਾਨੂੰ ਦਿਖ ਰਿਹਾ ਮਾਰਦਾਂ। ਉਹ ਵਿਚਾਲਾ ਤੁਹਾਨੂੰ ਨਹੀਂ ਵਿਚਾਲੇ ਜੀਂਦੀ ਸ਼ਕਤੀ ਕਮ ਕਰਦੀ। ਜਦ ਭਾਜੇ ਜਾਂਦਾ ਕਿਆ ਰਖੜਾ ਹੁੰਦਾ ਹੈ ਉਹਨੇ ਕਿ ਬਚੀ ਜਾਂਦਾ ਕਿਉਂ ਬਚਦਾ ਬਹੁਤ ساری ਕਹਾਣੀਆਂ ਨੇ ਸਾਡੇ ਬੋਲ ਟੁੱਡੇ ਰਾਜੇ ਦੀ ਵੀ ਇਹੀ ਕਹਾਣੀ ਹੈ ਜਿਹੜਾ ਚਿਰਤਰਾ ਦਾ ਦੂਜਾ ਆਪਣਾ ਜਿਹੜਾ ਚਿਰਤਰਾ ਦਾ ਉਹਦੀ ਕਹਾਣੀ ਵੀ ਇਹੀ ਹੈ ਇਹ ਹੀ ਹੋਈ ਜਾਂ ਉਹਦੇ ਇਲਾਵਾ ਇੱਕ ਹੋਰ ਕਹਾਣੀ ਹੈ ਕਿਸੇ ਦੀ कई ਦੀ ਪੂਰਨਪਰ ਦੀ ਕਹਾਣੀ ਇਹੀ ਹੈ ਵੱਟ ਕੇ ਸੈਂਕੜੇ ਕਹਾਣੀਆਂ ਰਹੇ ਜੀਆਂ ਜਿੱਥੇ ਰਾਜਾ ਰਹੇ ਬੰਦੇ ਬਰਬਾਦ ਤੇ ਲਗ ਨੂੰ ਵਜ ਨਹੀਂ ਉਹਦੇ ਹੱਥ ਫਰ ਵੱਟ ਕੇ ਹੂ ਛੜਿਆ ਦਾ ਲੇ ਗਿਆ ਸੀ ਵੱਟੇ ਛੜਦੇ ਉਹਨਾਂ ਹੱਥ ਫਰ ਵੱਟ ਕੇ ਹੂ ਛੜਤਾ ਐਂਕਈ ਕਹਾਣੀਆਂ ਬਹੁਤ ਸਾਰੀਆਂ ਕਹਾਣੀਆਂ ਬਣਾਈਆਂ ਨੇ ਪਰ ਚਲਦ ਨੇ ਜਰਨਤਾ ਦੇ ਵਿੱਚ ਉਹ ਇਹ ਦੱਸਣ ਬਾਤ ਹੈ ਮਾਰਤਾ ਲਿਖਣ ਬੱਧੀਆ ਉਹ ਮਰਿਆ ਨਹੀਂ ਮਾਰੇ ਰਾਖੇ ਇੱਕੋ ਆਪੋ ਮਾਰਨ ਦਾ ਕੰਝ ਨਹੀਂ ਆਉਂਦਾ ਹਾਂ جس کا حکم موج سکھ ہوے جس کا نام رکھ کنٹھ پر ہوے جڑا مارے رکھ مارال مال مال رکھن والا جس کا ہو پوج سکھ ہوے جے sukh چاہی دا ہوے ہو پجے جڑا منوکھا او تے او دے ਸੋਗ ਤਾਂ ਆਪ ਲੈ ਹੁੰਦੇ। ਸੋਗ ਆਪ ਲੈ ਦੁੱਖ ਹੋ ਦੇ ਸਕਦਾ। ਥੈਸਲਾ ਤੋਂ 5000 ਚੱਕ ਲੜਨੀ ਪੈਗੀ। ਉਹ ਬਾਕੀ ਦੇ ਸਤ ਨਾਲ ਜੇ ਉਹ ਤੋਂ ਕੋਈ ਨਹੀਂ ਸੰਸਾਦਿਤ ਹਰਤੇ। ਥਾਦਾ ਦਸ ਪਾ ਜਾਵੇ। ਕੀ ਕਰ? ਤੋਂ ਫਿਰ ਵੀ ਜਨਾਲ ਖੜੇ ਨੇ ਉਹ। सोहणा ने लेया कल मन के गुरु जी सोहता उन्होंने अपनी कोशे में लेया सोहता ले सकता अपनी कोशिश से वो ये बंधुगा गुरु का वचन वर्ने कई सुख मलना दुखों शरीर करके भी कर सकता लोककार सुधारि जो गुरु पे आओ जग है ਸਰੀਰ ਕਤਾਲ ਤੇ ਦੁੱਖੇ ਦੀ ਭੁੱਖ ਵੀ ਕੱਟੀ ਐ ਦੁੱਖ ਵੀ ਕੱਟੇ। ਜੋ ਭੁੱਖ ਕੱਟੀ ਉਹ ਤਾਂ ਸਬਤ ਕਾ ਕੱਟਣੀ ਬਈ। ਜਿਹੜਾ ਸੁਖ ਮਿਲਿਆ ਉਹ ਇਸ ਤਰ੍ਹਾਂ ਨਹੀਂ ਮਿਲਿਆ। ਸੁਖ ਮਿਲਿਆ ਉਹ ਕਿਉਂ ਭਾਰ ਹੈ। ਉਹ ਜਿਹੜਾ ਹੈ ਉਹਦੇ ਨਾਲ ਖੜੇ ਨੇ ਬਈ ਜਨਮ ਤੇ ਮਾਰੇ ਲਿਖਿਆ ਜਨਮ ਦਸਮ ਪਾਛਾ ਦੇ ਲਿਖਿਆ तुम्हारे लिए तैयार है किसी आदमी से लेके नहीं सबरे जान तुम्हारे लेके आदमी ले लेके नाऊं के वे आदमी के टेक हो कि टेको कि टेके हो तो कहीं से चली जाएगी बड़े बस्ती वस्ती चली जाओगी बहुत खतरनाक गल है के बहुत ही पक्की नाजर आई जावे ज्यादा फिसलते रहे ਉਹ ਤੇ ਫਿਰ ਉਸ ਜਗ੍ਹਾ ਜਾ ਕੇ ਇਹ ਇਦਾਂ ਹੀ ਗੱਲ ਹੈ ਸੱਚੇ ਆ ਇਹ ਨਹੀਂ ਤਾਂ ਤੁਹਾਡਾ ਕੀ ਕਰਾ ਫੁੱਲ ਪੈ ਗਏ ਉਮਰ ਦਾ ਜੇ ਗੱਲ ਛੱਡ ਕੇ ਕਹਿ ਦਈਏ ਨਾ ਜਿਹੜੇ ਲੋਕਾਂ ਨੇ ਨਹੀਂ ਰੋਕਿਆ ਵਾਹ ਪੁਰਸ਼ ਤੇ ਅਸਲ ਤੇ ਥਾਈ ਕੱਖ ਨਹੀਂ ਉਹਨਾਂ ਦੇ ਥੱਲੇ ਉਹਦਾ ਕਹੋਣੇ ਚਾਹੁੰਦੇ ਸੀ ਅਸਲ 'ਚ ਆ ਗੱਲ ਨਹੀਂ ਸੀ ਜਾਣਦੇ ਔਰ ਬੰਦੇ ਵੀ ਕੁਝ ਨਹੀਂ ਸੀ ਉਹਨਾਂ ਦੇ ਬੰਦੇ ਵੀ ਕੁਝ ਨਹੀਂ ਸੀ ਉਹਨਾਂ ਦੇ ਜਿਹੜੇ ਨੇ ਬੰਦੇ ਵੀ ਨਹੀਂ ਸੀ ਉਹ ਤਾਂ ਮਾਇਆ ਦੀ ਗੜੀ ਉਹਨਾਂ ਦੀ ਮਾਇਆ ਦਾ ਸੌਫੀਆ ਨਾ ਕੋੜ ਕੋੜ ਕੁਸ਼ੀ ਸੀ ਫਿਰ ਉਹ ਗੋੜਿਆ ਰੋਟੀ ਉਹ ਦਾ ਦੇਦੀ ਉਹ ਘਰਾਂ ਦੇ ਦਿੰਦੇ ਸੀ ਉਹ ਦੇਤੀਆਂ ਜਾਂ ਤਾਂ ਨਹੀਂ ਸੀ ਬੰਦੇ ਉਹ ਗੱਲ ਨਹੀਂ ਸੀ ਉਹਨਾਂ ਕੋਲ ਤਾਂ ਸੱਚੀ ਨਹੀਂ ਸੀ ਬੋਲਦੇ ਸਾਨੂੰ ਨਾ ਕਹੋ ਕਿਉਂ ਕਹਦੇ ਹੋ ਖੜਾਇਆ ਗੂੜੂ ਰੋ ਖਾਈ ਨਹੀਂ ਹੋ ਕੋਈ ਬੱਲੇ ਉਹ ਤਾਂ ਪਖੰਡਵਾਦ ਹੈ ਉਹਨਾਂ ਨੂੰ ਲੋਕਾਂ ਨੂੰ ਲਿਆ ਕੇ ਪਖੰਡਵਾਦੇ ਜਰੀਏ ਤਾਂ ਉਹ ਪੈਸਾ ਬਣਦਾ ਜੇ ਮਹਾਪੁਰਸ਼ ਨਾ ਕਹਦੇ ਜੋ ਰਾਡਿਆ ਦੇ ਸਾਹਮਣੇ ਉਹ ਨਾ ਵਿਖਾਇਆ ਕਰਦੇ ਥਾਂ ਲਿਆ ਕੇ ਨਵੇਂ ਤਾਂ ਲੋਕ ਚਲਾਵਗ ਮੈਨੇ ਦਿੱਤੇ ਜਿਵੇਂ ਹੁੰਦੇ ਇਹ ਤਾਂ ਆਨੰਦਿਆ ਟੈਕਨੀਕਾ ਨੇ ਇਹਨਾਂ ਪਰਭਾਪ ਹੁੰਦੀ ਜਿਹੜਾ ਸੱਚਾ ਉਹ ਤਾਂ ਗੱਲੇ ਨਹੀਂ ਕਰਦਾ ਉਹਨੂੰ ਲੋੜ ਕੀ ਹੈ ਗੱਲ ਦੀ ਉਹਦੇ ਕੋਲ ਬਹੁਤ ਕੁਝ ਹੁੰਦਾ ਹੈ ਲੋ ਉਹ ਅਗਲਾ ਤਾਂ ਚਿੰਬੜਦੀ ਹੈ ਵੀ ਇਹਦੀ ਜਿੱਦ ਉਹ ਘੱਟ ਨਹੀਂ ਦਿੰਦਾ ਤਾਂ ਉਹ ਤੋੜ ਦਿੰਦਾ ਵੀ ਮਾਰੇ ਜਾਓਗੇ ਤੁਸੀਂ ਫਿਰ ਨਾਲ ਜੁੜ ਕੇ ਜੇ ਤਾਂ ਨਾ ਬੋਲਣਾ ਨਾ ਜੇ کھانے نی ہن بچاونے ਨੇ پھر تھپڑ مارو او تیری گڈی دے منہ ای آندا کوئی ویسے نکال دوں گا کنے تیری پاؤں گا کوئی پرے ہو جا اے تقویض کیوں دینے اس کرکے یہ بہت ہی خطرناک گل ہے تھم لینی پڑی اے تھے اے پچھا بنایا ਜੇ ਮਾਨੁੱਖੀ ਦੇਖਾ ਕਦੇ ਵੀ ਤੁਹਾਨੂੰ ਬੜਨੀ ਨਹੀਂ ਹੈ ਮਨ ਨੂੰ ਚੈਨ ਨਹੀਂ ਬੜਨੂ ਸੁਖ ਜੇ ਵਿਅਕਤੀ ਨੂੰ ਡੇਕ ਬਣਾਲੀ ਬੜੀ ਖਤਰਨਾਕ ਲੱਗ ਜਾਏ ਇਹ ਉਹਨਾਂ ਜੋਤੀ ਤੇ ਤਾਂ ਅਕਲ ਵਿੱਚ ਤੇ ਜਨਨ ਦੇਣਾ ਚਾਹੀਦਾ ਤੇ ਤਾਂ ਅੱਜ ਦੁਬਾਰਾ ਬਿਚਾ ਦੇ ਆਏ ਸਿਮਰੂ ਆਰੋ एक बड़े श्लोक है तो बहुत गंभीर है तो के मन सुख पैदा ही ना होया सारा गीता अगर वो चलागा परिधि की तो फेरस ही होए और बड़ी जी दिक्कत ही चले अपनी गलती ना और जे मानोगे डेट छटोगे फिर दूसरा फायदा की जाए दूसरा फायदा की जाए ਜਾ ਮਾਨਵਕੀ ਤੇ ਖੋਲ ਹੀ ਦੋਤੇ ਪ੍ਰਤਿਗ ਦੂ ਲੜਿਓ ਬੂ ਅਸਲ ਜਪਾਨ ਕੋਈ ਤੇ ਖੋਲ ਤੇ ਨਾਮ ਦੀ ਤੇਖ ਲੱਗਾਈ ਨਹੀਂ ਦੂਯਾ ਅਲਾਹ ਉਹ ਮੁਖੇ ਦਾ ਸਦਾ ਰਹਿਣਾ ਜੀ ਬੇ ਜਦੋਂ ਖੋਹਾਂ ਲਈਏ ਇਹ ਮਾਨਵਕੀ ਨੇ ਤੇਖ ਦੀ ਜੇ ਉਹ ਖੁਦੇ ਨਾ ਖੋਲਵੇ ਨਾ ਜਿਹੜਾ ਦੀਦੀ ਤੇਖ ਲਈ ਹੈ ਤਾਂ ਕੋਈ ਮੰਦੇ ਨਹੀਂ ਹੈ ਦਾਸਾ ਬਾਜਨ ਕਹਾਵੇ ਜੋਪੋ ਕੋ ਪਰਮੇਸ਼ਰ ਉਚਰਾਤੇ ਸਭ ਤਰਫ ਗੁੰਡ ਮੈਂ ਪੜਾਂ ਮੈਂ ਹੋ ਪਰਮਪੁਰ ਦਾ ਦਾਸਾ ਦੇ ਖਣ ਆਇਓ ਜਿਹਾ ਤਮਾਸ਼ਾ ਹਰ ਪੜਾਈ ਦੀ ਗ੍ਰਹੀ ਹੈ ਅਸੀਂ ਕਰ ਕੀ ਰਹੇ ਹਾਂ ਕੀਤਾ ਸੀ ਕੀ ਹੈ ਤੁਕ ਕੀਤਾ ਇਹ ਬਹੁਤ ਹੀ ਗੁਭੀਰ ਮਤਲਬਾ ਟੌਪਿਕ ਸੀਗਾ ਜਿਹੜਾ ਇਹ ਰੋੜ ਸਕਦਾ ਸੰਤਾ ਇਹ ਸਾਰੇ ਸੰਤ ਦੇ ਦੇਣੇ ਨਾ ਪੀਣੇ ਨੇ ਇਹ ਅਸਲ ਦੇ ਵਿੱਚ ਗੁਰਮਤ ਜਿਹੜੀ ਪਹਿਲਾਂ ਤੇ ਖਲਾਬ ਤੇ ਖੁਗ ਇੱਥੇ ਤਾਂ ਹਿੰਦੂ ਮਤਿ ਹਿੰਦੂ ਮਤਿ ਦੇ ਆਦਮੀ ਹੋ ਰਹੇ ਉਹਨਾਂ ਨੇ ਤਾਂ ਕੰਪਰੋਮਾਈਜ਼ ਰੱਖਣ ਚਲੋ ਇਹ ਵੀ ਠੀਕ ਹੈ ਉਹ ਵੀ ਠੀਕ ਗੱਲ ਕਹਿੰਦੇ ਨੇ ਜਿੰਨ ਜਾਣਿਆ ਸੋ ਸੀ ਉਹ ਵੀ ਉਹਦੇ ਵਰਗਾ ਹੀ ਹੁੰਦਾ ਕੀ ਵਰਗਾ ਚਲ ਉਹਨਾਂ ਨੇ ਤਾਂ ਉਹ ਜੀ ਉਹਨਾਂ ਨੇ ਖੜਾ ਵੰਡ ਮੰਨ ਲਈ ਹੁੰਦੀ ਹੈ ਕਪਰੋ ਆ ਕੇ ਜਾਣਾ ਉਹ ਪਰਲੋਕ ਉਹਦਾ ਤਰੀਕਾ ਮੰਨਣ ਦਾ ਹੋਰ ਹੁੰਦਾ ਹੈ ਜਿਨ੍ਹਾਂ ਨੇ ਉੱਥਾਂ ਜੇ ਬੈਠਣਾ ਹੋਵੇ ਉਹਨਾਂ ਦਾ ਥੋੜਾ ਤਰੀਕਾ ਹੋਰ ਹੁੰਦਾ ਇਹ ਮਨੁੱਖ ਹੈ ਤੇ ਔਰ ਟੈਗ ਨਹੀਂ ਹੈ ਮੈਂ ਬਾਹਰ ਫੜ ਕੇ ਗੁਰੂ ਨੇ ਲੈ ਜਾਣ ਠੀਕ ਹੈ ਜਿਹੜਾ ਕਹਿੰਦਾ ਸੰਤ ਵਿਚੋਲਾ ਵਿਚਾਲੇ ਬਣਾਉਟ ਰਹੀ ਸਾਰੇ ਇਹੀ ਕਹਿੰਦੇ ਨੇ ਉਹ ਸੱਚੇ ਹੀ ਕਹਿ ਜਾਂਦੇ ਗੁਰੂ ਨੇ ਬਾਹਰ ਫੜ ਲਿਆ ਆ ਰਾਜਾ ਸਾੰਗੀ ਜੇਹੀ ਵਾਲੀ ਹੱਟ ਮੜ ਮੰਗਦੇ ਨੇ ਕਿ ਜਿਹੜਾ ਗਿਆਨ ਵੀ ਦੇ ਰਿਹਾ ਉਹਦੀ ਵੀ ਡੀਗਰੀ ਬਣਾਉਣੀ ਲੋੜੀ ਹੈ ਜਿਵੇਂ ਬਣਾਉਣਾ ਕੋਈ ਤੁਸੀਂ ਕਿਹਦੇ ਜਿਹਦੀ ਡੀਗਰੀ ਬਣਾਈਏ ਉਹ ਉਪਰਾਉ ਉਹ ਜਿਵੇਂ ਕੋਈ ਹੈ ਜਿਹੜਾ ਵੀ ਟੀਚਰ ਹੈ ਐਪਰੇ ਕਰਿਆ ਕਿਸੇ ਨੇ ਐਵੇਂ ਕਰ ਜੋ ਅੱਗੇ ਕੀ ਬਣ ਗਿਆ ਜਿਹੜਾ ਉਹਦੇ ਕੋਲ ਪੜਦਾ ਮੈਂ ਜਿਵੇਂ ਟੀਚਰ ਲੱਗਣਾ ਉਹਨੂੰ ਕਰਨੀ ਪੈਣੀ ਹੈ ਐਵੇਂ ਕਰਦੀ ਬੈਣੀ ਹੈ ਉਹਦਾ ਹੁੰਦਾ ਕਾਬਰ ਹੋਣਾ ਪਹਿਲਾਂ ਤਾਂ ਹੋਇਆ ਬਣੂਗਾ ਫਿਰ ਹੋਇਆ ਜਦੋਂ ਮੈਂ ਚੁੱਕੀ ਉਹਦਾ ਰੱਖਿਆ ਡੇਕ ਪਰਮੈਸ਼ਰ ਤੇ ਤੁਸੀਂ ਰੱਖ ਲਈ ਡੇਕ ਆਦਮੀ ਤੇ ਆ ਗਏ ਹੁਣ ਤੁਸੀਂ ਆ ਗਏ ਠੰਡੇ ਤੇ ਤੁਸੀਂ ਛੱਡੋ ਬਸ ਆਨੂੰ ਛੱਟੇ ਆਦਮੀ ਤੇ ਰੱਖ ਲਈ ਜੈਸਾ ਸੇਵੈ ਤੈਸਾ ਹੋਏ ਜਾਨੂ ਫਿਰਦਾ ਰਹੂਗਾ ਫਟਕੇ ਦਿਖਾਉ ਜਾਂਦੀ ਆ ਵੀ ਲੱਗੀ ਦਾ ਜੈਨੋ ਜੈਨੋ ਜੈਨੋ ਹੋਇਆ ਜੈਨੋ ਸੇਮਿਸ ਤੈਸਾ ਹੋਏ ਤੁਸੀਂ ਦਿਖਾਓ ਇਹ ਵੀ ਦੋਖਾ ਗਿਆ ਛੁੱਟੇ ਜੀ ਤੇ ਤੇ ਆਟੋਮੈਟ ਜੇ ਤੁਸੀਂ ਦੇਖ ਰੱਖੋ ਨਾ ਜਬੋ ਹਾਰਾ ਫੇਰ ਢੋਲੀ ਦੇ ਕੇ ਖੋਦੀਆ ਜਾਤੇ ਸਿਰੋ ਹਾਰਾ ਰਹਾ ਹੈ ਹਾਂ ਸਿਰੋ ਹਾਰਾ ਰਹਾ ਹੈ ਤੇ ਤੇ ਕੋਦੀਆ ਜਾਤੇ ਸਹੀ ਹੁੰਦੀ ਹੋ ਕਿ ਜੇ ਕਾਦਮੀ ਲੜਕਿਆ ਹੋਇਆ ਚਲੋ ਰਸੇ ਨਾਲ ਆਪਣੇ ਜੋਰ ਨਾਲ ਰਸਾ ਬੋਲ ਲਪਾ ਉਹ ਕਦੇ ਕਹੋ ਤੂੰ ਮੇਰੀਆਂ ਲੱਤਾਂ ਫੜ ਕੇ ਲੱਗ ਗਿਆ ਰਸਾ ਨਾ ਫੜ ਉਹ ਡੋਗੜ ਦੇ ਨੀਦ ਉਹਦੀ ਵੀ ਬੇਜਮਾ ਜੋਰ ਕੋਈ ਕਹੂਗਾ ਵੀ ਮੇਰੀਆਂ ਲੱਤਾਂ ਫੜ ਲੈ ਤੂੰ ਰਸਾ ਨਾ ਫੜਿਆ ਜਾਂ ਰਸਾ ਚੱਲਦਾ ਹੈ ਨਾਲ ਬਰਾਬਰ ਰਸਾ ਫੜੂ ਰਸੇ ਹੀ ਫੜਾਉਗਾ ਬੇੜਿਆ ਸੰਦੇ ਜੋਰ ਨਾ ਮੈਂ ਦੋਗਮੇ ਚੱਲੂ ਫਿਰ ਦੋ ਉਹ ਕੌਤਾਰ ਹੋ ਕੇ ਬੜ ਜੋ ਉਹ ਹੋਇਆ ਕੋਈ ਅਰੇ ਤੇ ਮੈਂ ਕਾ ਤੂ ਬੋ ਉਹ ਨਹੀਂ ਕਹਿ ਸਕਦਾ ਇਹਦਾ ਸਾਰੇ ਵਿਖਿਆ ਦੇ ਕੀੜੇ ਨੇ ਹਣਾ ਇੱਥੇ ਆਪ ਰਹਿਣਾ ਇੱਥੇ ਹਮ ਰੋਣਾ ਆਪਣੇ ਡੇਰੇ ਬਣਾਉਣੇ ਨੇ ਆਪਣੀਆਂ ਫੋਟੋਆਂ ਖਿਡਾਉਣ ਜੇ ਬਾਅਦ ਚ ਅਜੇ ਬਹੁਤ ਬਰੇਦ ਬਣ ਕੇ ਫਿਰ ਤੁਰੀ ਜਾਂਨ ਲੋਕਾਂ ਨੇ ਸੁੱਖਾਂ ਸੁਖੀ ਜਾਣੀਆਂ ਆ ਕੇ ਇਹਨਾਂ ਦੀ ਆਹ ਕੋ ਜਾ ਹੈ ਜੋ ਕੋ ਐਸੇ ਬੜੇ ਲੋਏ ਨੇ ਇੱਥੇ ਗਏ ਹੁੰਦੇ ਨਾ ਇਤੋਂ ਜ਼ਿਆਦਾ ਕੋਈ ਨਹੀਂ ਹੋਗਾ ਹਾਂਜੀ ਜਿਸ ਦਾ ਹੁਕਮ ਬੁੱਝ ਸੋਖ ਹੋਏ ਜਿਸ ਨਾਮ ਰਖ ਕੰਠਪਰੋਏ ਜਿਸ ਹੁਕਮ ਬੁੱਝ ਸੋਖ ਹੋਏ ਉਹਦਾ ਹੁਕਮ ਬੁੱਝ ਕੇ ਸੁਖਾ ਹੈ ਸੋਹਾ ਜਿੰਨਾ ਜਰ ਹੁਕਮ ਨਹੀਂ ਬੁਝਣਾ ਬੁਝਾ ਜਾਂਦਾ ਕੋਈ ਸੋਹ ਨਹੀਂ ਉਹ ਜਾ ਬੁਝਿਆ ਜਾਉ ਤੋ ਖਰਸੋ ਕੋ ਬਰਾਬਰ ਹੋ ਗਏ ਉਥੋ ਹੀ ਆਏ ਹੋਏ ਨੇ ਉਥੋਂ ਕੀ ਆਉਣਾ ਉਥੋਂ ਤੇ ਗਿਫਟ ਉਹ ਹਰ ਗਿਫਟੇ ਹੁੰਦੀ ਉਹ ਕਹਾ ਆਇਆ ਦਰਵਾਜ਼ੇ ਤੁਸੀਂ ਅੱਜ ਉਹ ਜਿਹੜਾ ਸੀ ਲੰਚ ਸੀਗਾ ਉਹਦੇ ਵਿੱਚ ਬਹੁਤ ਹੈਵੀ ਸੀਗਾ ਇੱਕ ਗੋਲੀ ਲੱਗ ਰੋ ਸਾਗਰ ਆਜ ਮੋਹਿਬੇ ਡੁੱਬਦਾ ਦਾਰੂ ਅਨੌਰ ਉਹ ਆਜ ਮੋਹਿਬੇ ਇਹ ਨਾ ਕਰਦਾ ਖਾਲਿਆ ਹੋਰ ਕੋਈ ਉਮਤਾ ਨਾਲ ਜੰਗੀ ਪ੍ਰੀਖਿਆ ਲੈ ਉਹ ਹੋਣੀ ਹੈ ਹੁੰਦੀ ਹੈ ਕੋਈ ਪਾਣੀ ਦੇ ਦਿੱਤਾ ਉਹ ਸੂਤ ਧੋਲਾ ਫਿਰ ਉਹ ਵੀ ਉਹਦੀ ਵੀ ਲੋਡ ਹੁੰਦੀ ਹੈ ਉਹਦੀ ਵੀ ਲੋਡ ਹੁੰਦੀ ਹੈ ਇਹ ਰਿਐਕਸ਼ਨ ਕਰ ਜਾਂਦਾ ਸਭ ਸੋਗ ਦੇ ਐਕਸ਼ਨ ਕਰਦਾ ਸਿਰਫ ਦੁੱਖ ਦੇ ਕਰਦਾ ਸੁੱਖ ਨਹੀਂ ਕਰਦਾ ਫਿਰ ਸਿਰਫ ਉਹਨੇ ਕੋਈ ਜੂਜੇ ਸੋਗ ਸੋਗ ਜਾਂ ਦੁੱਖ ਹੋ ਗਈ ਨਾ ਦੇ ਕੋ ਝੂਗਾ ਬੇ। ਜੇ ਕੋ ਖ ਲੱਗ ਗਈ ਨਾ ਇੱਕ ਵਾਰ ਖਾਤੀ ਤੇ ਰੋਟੀ ਸਾਡੀ ਇਹ ਜਿਹੋ ਦਾ ਟੇਸਟ ਟੇਸਟ ਵੀ ਘੁੱਲ ਗਈ ਰੋਟੀ ਬੰਨ ਜਾ ਕੇ ਆ ਜਾਂਦਾ। ਸੋ ਇੱਕ ਵਾਰ ਖਾਦੀ ਸੀ ਉਹਨਾਂ ਵਗਾਦੀ ਹੋਈ। ਉਹ ਰਹਿ ਹਾਂਜੀ सिमर सिमर सिमर सिमर प्रभु सोए नानक बिगा ना न लागे कोई सिमर सिमर सिमर प्रभु सोए एस कर के प्रब दी जड़ी है सोए जड़ी ओदी शोभा आ कुर्बानी ओदी शोभा है सुख होए हो नाम रख कंठ परोए तस्का हुकुम भूल ਇਸ ਤੋਂ ਹੁਕਮ ਪੁਜਾਂਗੇ ਹੁਕਮ ਪੁਜਾਂਗੇ ਤਾਂ ਸੁਖ ਹੈ ਇਹ ਉਹ ਕੀ ਹੈ ਜੋ ਹੁਕਮ ਦੇ ਵਿੱਚੋਂ ਤੁਹਾਨੂੰ ਗਿਆਨ ਮਿਲਿਆ ਹੈ ਜੋ ਹੁਕਮ ਦੇ ਵਿੱਚੋਂ ਸੋਝੀ ਮਿਲਿਆ ਹੈ ਅੱਖਾਂ ਕੰਟ ਫਰੋਏ ਮਰੋ ਦੱਸੀ ਵੀ ਜਾ ਪਬਲਿਕ ਨੂੰ ਜੇ ਇਹਦਾ ਰਹੇਗਾ ਤਾਂ ਹੋਣ ਕੋਈ ਫਾਇਦਾ ਹੋਣੀ ਆਏ ਜਿਹੜੇ ਦੂਏ ਨੇ ਨਾ ਲੋਕਾਂ ਨੂੰ ਡੋਬਣ ਵਾਲੇ ਇਹਨਾ ਤੋਂ ਆਪ ਕੋ ਹੋਰ ਬਹੁਤ ਨੇ ਲੋਕ ਆਹੋ ਜਿਹੜੇ ਨਾ ਦੀ ਮਗਰ ਜਨਾ ਦੋਸ ਉਹ ਬਚ ਜਾਣਗੇ ਜਿਹੜੇ ਜਿਆਦਾ ਸਿਆਣੇ ਨੇ ਨਹੀਂ ਮੰਨਣ ਵਾਲੇ ਤੇਰੀ ਗੱਲ ਉਹ ਡੁੱਬ ਜਾਂਦੇ ਕੋਈ ਨਹੀਂ ਬਹੁਤ ਜਾਣ पे ਜਮਕਾ ਪਾ ਹੋ ਗਿਆ ਆਪਾ ਜਿਹੜੇ ਸਿਆਣੇ ਨੇ ਉਹ ਜੋ ਵਰਤੀ ਕਰੀ ਜਾਣ ਪਰ ਢੋਲੇ ਵੀ ਆ ਹੁੰਦੇ ਨੇ ਬਹੁਤ سارے ਉਹਨਾਂ ਦਾ ਬਚਾਅ ਹੋ ਜੂਗਾ ਇਸ ਦਾ ਨਾਮ ਰੱਖ ਕੰਡ ਕੇ ਰੱਖਿਆ ਤਾਂ ਦੱਸਿਆ ਜਾ ਸਕਦਾ ਹੈ ਕਿ ਇਹਦੇ ਨੂੰ ਸਮਝਾਇਆ ਜਾ ਸਕਦਾ ਹੈ ਹੁਕਮ ਉੱਗਿਆ ਨਾਨਕ ਗੁਰਮੁਖ ਆਪ ਜਾਇ ਸੰਬੋਧਨ ਸੀ ਉਹ ਗੁਰਮੁਖ ਆਪੇ ਹੁੰਦਾ ਹੋ ਭਗਤ ਜਨਾ ਆਪਾ ਅੱਪਾਰਖਿਆ ਉਹਨੇ ਆਪਣਾ ਆਪਾ ਪਾਕਿਸਤਾਨ ਦੇ ਵਿੱਚ ਰੱਖਿਆ ਜਿਵੇਂ 7 ਜਨਾਂ ਕੇ ਮਨ ਵਿੱਚ ਰਹਾਉਂ ਨੌਦੇ ਅਵਤਾਰ ਕੇ ਮਨ ਵਿੱਚ ਰਹਾਉਂ ਕੇ ਜਨਾਂ ਦੇ ਮਨ ਦੇ ਵਿੱਚ ਪ੍ਰਗਟ ਹੁੰਦਾ ਉਹ ਵਿਸ਼ਰਾਮ ਕਰਦਾ ਹੁੰਦਾ ਤਾਂ ਹੀ ਭਗਵਾਨ ਆਪਣੇ ਵਿਸ਼ਰਾਮ ਕਰਦੇ ਕੋਈ ਨਾਮ ਨਾਲ ਜੁੜ ਕੇ ਹੀ ਕਿਸਾਨ ਹੋ ਸਕਦਾ ਉਹ ਨਾਮ ਉੱਦਦਾ ਉਹਦੇ ਪਰਗਟ ਹੋਉਂਦੇ ਰਹੋ ਉਹਨਾਂ ਨਾਲ ਉਹਤੀ ਜੀ ਉਹ ਜਿਆਦਾ ਆਪਣਾ ਆਪਾ ਉੱਥੇ ਰੱਖਿਆ ਹੋਇਆ ਤਾਂ ਉਹ ਅਸਲ ਦੇ ਵਿੱਚ ਆਪ ਹੀ ਖਰਾ ਰਿਆ ਹੁੰਦਾ ਹੈ ਤਸਦੀ ਦੀ ਲੱਗਦਾ ਹੁੰਦਾ ਬੱਦਾ ਕਰਾਉਂਦਾ ਬੱਤਾ ਵੀ ਜਿਹੜਾ ਧੀੜ ਹੈ ਲੱਗਦਾ ਹੁੰਦਾ ਸਰੀਰ ਇੱਥੇ ਜਾ ਕੇ ਫਸ ਜਾ ਕੇ ਧਰੀਏ ਤੇ ਆਤਮਾ ਕਿਹੜਾ ਦੀ ਆਤਮਾ ਦਾ ਗੱਲੇ ਦੀ ਆਤਮਾ ਦਾ ਹਾਂ ਤੇ ਕੀ ਹੋ ਜਾਂਦਾ ਫਿਰ ਜਾਣ ਇਹ ਦਰਿਆ ਵੀ ਤੇ ਕਿਆ ਤੁਹਾਨੂੰ ਸੁਬਤ ਲਾਣ ਜੁੜਿਆ ਹੋਇਆ ਨਾ ਜਾ ਕੇ ਪੜ੍ਹਦੇ ਤੇ ਉਹ ਸੁਬਤ ਦਾ ਰਿਆ ਇੱਕ ਪਰ ਆਤਮਾ ਦਾ ਦੀਦੀ ਕੋਈ ਨਹੀਂ ਨਾ ਜੇ ਆਤਮਾ ਦੀ ਜਾਣਾ ਨਹੀਂ ਡੋਲਾ ਉਹਨੂੰ ਕਿਰੋ ਆਤਮਾ ਆਪਣੇ ਅੰਦਰ ਹੁੰਦਾ ਹੈ ਨਾ ਦੂਹੇ ਦੀ ਤੇ ਮੇਰੇ ਆਪਣੀ ਦੇਖ ਕੇ ਰਵੇ ਦੂਏ ਦਾ ਧਾਰਾ ਅੰਦਰ ਜਜਮੈਂਟ ਹੈ ਆ ਵੀ ਇਹ ਆਇਆ ਕੋਈ ਸਰਦਾਰ ਕਿ ਕਿਸੇ ਕੋਈ ਹੋਵੇ ਹਨ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬੇਗਨਾਂ ਲਾਗੇ ਕੋਈ ਸਿਮਰ ਸਿਮਰ ਸਿਮਰ ਪ੍ਰਭ ਸੋਏ ਆ ਜਿਹੜੀ ਪ੍ਰਾਪਤੀ ਸੋਏ ਆ ਨਾ ਪ੍ਰਭਾਣੀ ਇਹਦਾ ਸਬੰਧ ਕਰ ਆ ਸਭ ਚੀਜ਼ ਸਿੱਖਿਆ ਤੇਰੀ ਪਿਛਲੇ ਜਨਮ ਦੀ ਇਹ ਜੇ ਸਫਲ ਕਰੇਗਾ ਤੇਰਾ ਚੇਤਾ ਅਜੂ ਸਾਰੇ ਪਿਛਲੇ ਜਨਮ ਨਾਲ ਹੀ ਆਗਾ ਜੰਗੇ ਕੁਝ ਦੇ ਜਾਨ ਮਾਂ ਦੀ ਸੋਈ ਹੋਈ ਜਾਗੂਗੀ ਨਹੀਂ ਸੋਈ ਸੋਈ ਜਾਗੀ ਮੈਂ ਸੋਈ ਸੋਈ ਜਾਗੂਗੀ ਜਾਂ ਜਾਗੂਗੀ ਸਾਰੇ ਜਾਨ ਹੋ ਜੂ ਬਹੁਤ ਦੂਰ ਤੱਕ ਦਾ ਵਿਆਹ ਹੋ ਜੂ ਆ ਦੋ ਤਿੰਨ ਸੌ ਸਾਲ ਚਾਰ ਸੌ ਸਾਲ ਦਾ ਕੋਈ ਖਾਣ ਵਾਲੀ ਹੈ ਬਹੁਤ ਪੁਰਾਣਾ ਪੁਰਾਣਾ ਹੈ ਤਾਂ ਇਸ ਵਿੱਚ ਉਹ ਇਸ ਤਰੀਕੇ ਨਾਲ ਦਸ ਲੱਗ ਜਾਂਦੇ 2 30 500 ਸਾਲ ਦੀ ਦਸ ਜਗੇ ਲੱਗ ਜਾਂਦਾ ਹੁੰਦਾ ਉਹ ਉਹ ਪੈਲ ਹੁੰਦੀਆਂ ਨੇ ਸਾਡੇ ਉਹਦੇ ਨਿਸ਼ਾਨੀਆਂ ਹੁੰਦੀਆਂ ਨੇ ਅਸਵਾਦੇ ਹੋਣ ਹਾਂਜੀ ਸੇਮਰ ਸੇਮਰ ਸੇਮਰ ਪ੍ਰਭ ਹੋਏ ਨਾਨਕ ਜਿਹੜੇ ਜਿਹੜਾ ਜਨਮ ਜੋ ਤੇਰੀ ਪੱਤੀਆ ਜਦ ਬਿਜੋ ਉਹ ਜਿਹੜਾ ਬੰਦਾ ਬੋਲਦਾ ਹੈ ਤੁਹਾਡਾ ਠੀਕ-ਠਾਕ ਕਰਦਾ ਹੈ ਤੇਰੀ ਗੱਡੀ ਕਿੱ데 ਰੁਕੇ ਨਾ